ਅੱਜ ਕਿਨਹੂ ਗੁਰਮੁਖ ਜਾਨਾ ਇਹ ਖੇਲ ਕਠਨ ਹੈ ਕਿਨਹੂ ਗੁਰਮੁਖ ਕਿਨਹੂ ਗੁਰਮੁਖ ਦਾਦਾ ਇਹ kenu ho parmukhtana he khel kathanga kenu ho parmukhtana he khel kathanga khel kathn hai khel kathn hai khel kathn hai khel kathn hai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 good day ਬਾਣ त्याਗੋ ਕਾਮ ਕਰੋਦ ਸੰਗਤ ਦੁਰਜਨ ਕੀ ਤਾਤੇ ਅਹ ਨਿਸਪਗੋ ਸੁਖ ਦੁਖ ਦੋਨੋ ਸਮ ਕਰ ਜਾਣੈ ਔਰ ਮਾਨ ਅਪਮਾਨਾ ਹਰਖ ਸੋਗ ਤੇ ਰਹੈ ਅਚੀਤਾ ਤਿੰਨ ਜਗ ਤਤ ਪਛਾਨਾ ਉਸ ਤਤ ਨਿਦਾ ਦਉ ਕੋ ਜੈ ਪਦ ਦਰਬਾਨ ਜਨਦਾਨ ਕਹੇ ਖੇਲ ਕਠਨ ਹੈ ਜਨਦਾਨ ਕਹੇ ਖੇਲ ਕਠਨ ਹੈ ਜਨਦਾਨ ਕਹੇ ਖੇਲ ਹੈ ਖੇਲ ਕਠਨ ਹੈ ਦਾ ਦਾ ਇਹ ਖੇਲ ਕਟਲ ਹੈ ਤੈਨੂੰ ਹੋਰ ਮੁਕਤਦਾ ਦਾ ਇਹ ਖੇਲ ਕਟਲ ਹੈ ਤੈਨੂੰ ਹੋਰ ਮੁਕਤਦਾ ਦਾ ਇਹ ਕਬੀਰ ਜੋ ਤੋਹ ਸਾਦ ਕੀ ਸੀਸ ਕਾਚ ਕਰ ਗੋਏ ਖੇਲ ਖੇਲਤ ਖੇਲ ਤ ਹਾਲ ਕਰ ਜੋ ਕਿਛੁ ਹੋਏ ਤਾ ਆ ਕਬੀਰ ਐਸੀ ਹੋਏ ਪਰੀ ਮਨ ਕੋ ਪਾਵਤ ਕੀਨੇ ਮਰਨੇ ਤੇ ਕੀ ਦਰਪਲਾ ਜਬ ਹਾਥ ਸਦੌਰਾ ਲੀਨੇ ਇਹ ਖੇਲ ਕਠਨ tell me ਨਿਕੋਦਾਓ ਸ਼ੁਰਾ ਸੋ ਪਹਚਾਲੀਏ ਜੋ ਲੜੈ ਤੀਨ ਕੇ ਹੇਤ ਪੁਰਜਾ ਪੁਰਜਾ ਕੱਟ ਬਰੇ ਆ ਕਬ ਹੁੰਦਾ ਛੱਡਦਾ ਖੇਤ ਏਕੇਲ ਆ ਚਿੱਕ ਨੂੰ ਹੋਰ ਨਖਦਾ खेल कठिन है खेल कठिन है खेल कठिन है खेल कठिन है खेल कठिन है खेल कठिन है ਸਤਕਾਰਯੋਗ ਸਾਧ ਸੰਗਤ ਜੀਓ ਆਪਣੀ ਆਪਣੀ ਰਸਨਾ ਪਵਿੱਤਰ ਕਰਨ ਵਾਸਤੇ ਮਨ ਚੇਤ ਬਿਰਤੀ ਨੂੰ ਇਕਾਗਰ ਕਰਨ ਵਾਸਤੇ ਆਖੋ ਧੰਨ ਸ੍ਰੀ ਸਤਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਧੰਨ ਰਾਮ ਸਿੰਘ ਜੀ ਦੇ ਦੀਵਾਨੇ ਇਹਨਾਂ ਵਾਸਤੇ ਬਹੁਤ ਪਰਮਾਨ ਆਏ ਨੇ ਗੁਰਸਿੱਖੀ मार्ग ਔਖਾ बहुता है ਇਹਦੇ ਉੱਤੇ ਚੱਲਣਾ ਸੀਸ ਭੇਟ ਪਹਿਲਾ ਕਰਨਾ ਪੈਂਦਾ ਗੁਰੂ ਚਰਨਾ ਵਿੱਚ ਭਾਈ ਗੁਰਦਾਸ ਕਹਿੰਦੇ ਨੇ ਗੁਰਸਿੱਖੀ ਬਾਰੀਕ ਹੈ ਖੰਡੇ ਧਾਰ ਗਲੀ ਅਤ ਭੀੜੀ ਉਥੇ ਟਿਕੇ ਨਾ ਪੁਣਾਣਾ ਚੱਲ ਨਾ ਸਕੇ ਉੱਪਰ ਕੀੜੀ ਗੁਰਸਿੱਖੀ ਮਾਰਗ ਦੇਸ਼ ਤੇ ਧਰਮ ਤੋਂ ਕੁਰਬਾਨ ਹੋ ਜਾਣਾ ਆਪੇ ਨੂੰ के ਕੇ ਗਊ ਤੇ आप निशावर कर देना बहुत ਕਰ कम है ਔਖਾ ਕੰਮ ਹੈ ਸਾਡੇ ਗੁਰੂ ਸਾਹਿਬਾਂ ਨੇ ਇਹ ਦਿੱਤੇ ਚੱਲਣ ਦੇ ਸੁਝਾਓ ਦਿੱਤੇ ਨੇ ਪਾਤਸ਼ਾਹ ਗੁਰੂ ਅਰਜਨ ਦੇਵ ਕਹਿੰਦੇ ਨੇ ਪਹਿਲਾ ਮਰਨ ਕਬੂਲ ओहो सबना की रेणका तौ आओ हमारा पास जओ तौ प्रेम खेलन का चाहो चाहो सिर तर तली गली मेरी आओ इत मार्ग पैर तरी जाए सिर दी जा कान दा की जाए समा आया सतगुरु राम सिंह जी दा ओ समय सिख राज दी चढ़दी कलासी पंजाब विच ਪਰ ਸਤਗੁਰੂ ਰਾਮ ਸਿੰਘ ਜੀ ਦੇ ਸਮੇਂ ਵਿੱਚ ਹੀ ਵੰਧਿਆ ਵੰਧਿਆ ਸਿੱਖ ਰਾਜ ਖਤਮ ਹੋਇਆ ਤੇ ਪੰਜਾਬ ਦੀ ਧਰਤੀ ਤੇ ਕੀ ਸਾਰੇ ਹਿੰਦੁਸਤਾਨ ਵਿੱਚ ਅੰਗਰੇਜ਼ ਕਾਮਯਾਬ ਹੋ ਗਏ ਅੰਗਰੇਜ਼ ਦਾ ਰਾਜ ਹੋ ਗਿਆ ਉਸ ਵੇਲੇ ਸਤਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਸਿੱਖਾਂ ਨੂੰ ਹਿਲਾਉਣਿਆ ਸਿੱਖਾਂ ਨੂੰ ਉਪਦੇਸ਼ ਦਿੱਤਾ ਦੇਸ਼ ਧਰਮ ਤੋਂ ਕੁਰਬਾਨ ਹੋਣ ਵਾਸਤੇ ਜਿਹੜਾ ਉਪਦੇਸ਼ ਦਿੱਤਾ ਸੀ ਉਹ ਇਹਨਾਂ ਸ਼ਬਦਾਂ ਵਿੱਚ ਕਿਸੇ ਕਵੀ ਨੇ ਬਿਆਨ ਕੀਤਾ ਹੈ ਦੇਸ਼ ਦੀ ਖਾਤਰ ਵਤਨ ਪੁਜਾਰੀ ਤੂੰ ਮਰਨੋ ਨਾ ਡਰ ਖਾਇ ਕਰ ਦੇਸ਼ ਦੀ ਖਾਤਰ ਵਤਨ ਪੁਜਾਰੀ ਮਰਨੋ ਨਾ ਡਰ ਖਾਇ ਹੱਤਰ ਵਕਨ ਪੁਤਾਰੀ ਮਰ ਲੋਲਾ ਕਰ ਖਾਇਆ ਕਰ ਦੇਸ਼ ਦੀ ਤਾ ਸنگਜੀ ਦੇ ਉਪਦੇਸ਼ ਦੇ ਦਿੱਤੇ ਉਹਨਾਂ ਦੇ ਪ੍ਰਚਾਰ ਦੇ ਤੋਪਖਣ ਮੈਂ ਕਈ ਵਾਰ ਅਰਜਾ ਕੀਤੀਆਂ ਨੇ ਸਤਗੁਰੂ ਰਾਮ ਸਿੰਘ ਜੀ ਨੇ ਜੋ ਈਸ਼ਵਰ ਭਗਤ ਪੈਦਾ ਕੀਤੇ ਨਾਮ ਦੀ ਦਾਤ ਦੇਣੀ ਸ਼ੁਰੂ ਕੀਤੀ ਤੇ ਈਸ਼ਵਰ ਭਗਤਾ ਨੇ ਆਪਣੀ ਮਿਸਾਲ ਕਾਇਮ ਕਰ ਦਿੱਤੀ ਦੁਨੀਆ ਵਿੱਚ ਕਿਸੇ ਕਵੀ ਨੇ ਲਿਖਿਆ ਕਹਿੰਦਾ ਉਹਨ ਫੇਰ ਬਣਾਏ ਨਾਮਦੇਵ ਸਦਨ ਤੇ ਧੰਨੇ ਉਹਨ ਸੈਨਦਾਈ ਬੁਤਕਾਰਯਾ ਕੀਤੇ ਕਈ ਬੰਨੇ ਉਨ ਕਾਫਰ ਭੁੱਲੜ ਮੁਨਕਰਾਂ ਦੇ ਹੈਂਕੜ ਭੰਨੇ ਚਰਨੀ ਲਾਰੇ ਠੱਗ ਚੋਰ ਮੰਨੇ ਪਰ ਮੰਨੇ ਉਨ ਨਿੰਦਕ ਦੁਸ਼ਟ ਹਰਾਮ ਖੋਰ ਸਾਖਤ ਨਿਸਤਾਰੇ ਤੇ ਪਾਪ ਕਰਨ ਦੇ ਚੌਧਰੀ ਕਈ ਪੱਤ ਤੇ ਉਧਾਰੇ ਸਤਗੁਰੂ ਰਾਮ ਸਿੰਘ ਜੀ ਨੇ ਈਸ਼ਵਰ ਭਗਤ ਐਸੇ ਪੈਦਾ ਕੀਤੇ ਜਿਨ੍ਹਾਂ ਨੇ ਪਿਛਲੇ ਭਗਤਾ ਦੇ ਰਿਕਾਰਡ ਦੇਸ਼ ਭਗਤੇ ਹੋ ਜੇ ਪੈਦਾ ਕਰਦੇ ਤੇ ਜੇ ਹੋ ਅੱਜ ਦੀ ਮਿਸਾਲ ਤੁਸੀਂ ਅਰਜ਼ ਕਰਨੀ ਹੈ ਮੈਂ ਕਿ ਸਤਿਗੁਰੂ ਰਾਮ ਸਿੰਘ ਜੀ ਨੇ ਦੇਸ਼ ਭਗਤ کیسے ਪੈਦਾ ਕੀਤੇ ਸਤਿਗੁਰੂ ਰਾਮ ਸਿੰਘ ਜੀ ਨੇ ਸਿੱਖ ਰਾਜ ਦਾ ਖਤਮ ਹੋਣ ਦਾ ਕਾਰਨ ਇਹ ਲੱਭਾ ਕਿ ਸਿੱਖ ਆਪਣੀ ਮਰਜ਼ਾਦਾ ਛੱਡ ਗਏ ਨੇ ਨਾਮ ਬਾਣੀ ਤੋਂ ਦੂਰ ਹੋ ਗਏ ਨੇ ਗੁਰੂ ਚਰਨਾਂ ਨਾਲੋਂ ਟੁੱਟ ਗਏ ਤੇ ਧਿਆਨ ਰੱਖਣਾ ਜਿੰਨਾ ਚਿਰ ਗੁਰੂ ਚਰਨਾਂ ਨਾਲ ਗੁਰਸਿੱਖ ਜੁੜਿਆ ਰਹਿੰਦਾ ਨਾ ਉਹਨਾਂ ਚਿਰੇ ਮਰਦਾ ਨਹੀਂ ਸਿੱਖ ਦੀ ਮੌਤ ਉਦੋਂ ਹੁੰਦੀ ਆ ਜਦੋਂ ਗੁਰੂ ਨਾਲੋਂ ਟੁੱਟ ਜਾਏ ਗੁਰੂ ਰਾਮਦਾਸ ਕਹਿੰਦੇ ਨੇ ਜੋ ਪ੍ਰਾਣੀ ਜਲ ਬਿਨ ਹੈ ਮਰਦਾ ਜੋ ਪ੍ਰਾਣੀ ਜਲ ਬਿਨ ਹੈ ਮਰਦਾ ਤੇ ਗੁਰਸਿੱਖ ਗੁਰ ਮਰ ਜਾਈ ਇਸ ਤਰ੍ਹਾਂ ਦੀ ਜਦੋਂ ਗੁਰੂ ਨਾਲੋਂ ਟੁੱਟਿਆ ਉਦੋਂ ਮੌਤ ਆ ਜੇ ਜਿੰਨਾ ਚਿਰ ਗੁਰੂ ਨਾਲੋਂ ਨਾ ਟੁੱਟੇ ਮਰ ਨਹੀਂ ਸਕਦਾ ਸਿੱਖ ਐਸੀ ਇੱਕ ਮਰਜ਼ਾਦਾ ਹੈ ਗੁਰੂ ਨਾਲੋਂ ਟੁੱਟ ਗਏ ਨਾਮ ਪਾਣੀ ਨਾਲੋਂ ਟੁੱਟ ਗਏ ਤੇ ਸਿੱਖ ਰਾਜ ਖਤਮ ਹੋ ਗਿਆ ਸਤਗੁਰਾਂ ਨੇ ਉਪਦੇਸ਼ ਦਿੱਤਾ ਕਿ ਸਰ ਦੇ ਸਰਦਾਰੀ ਮਿਲਦੀ ਦਿਲ ਦਿੱਤਿਆਂ ਦਿਲਦਾਰ ਮਿਲੇ ਦੋਵਾਂ ਨਾਲੋਂ ਆਜ਼ਾਦੀ ਮਹਿੰਗੀ ਤੂੰ ਦੋਵੇਂ ਹੀ ਪੇਟ ਚੜਾਇਆ ਕਰ ਸਤਗੁਰੂ ਰਾਮ ਸਿੰਘ ਜੀ ਦੇ ਇਸ ਉਪਦੇਸ਼ ਨੇ ਗੁਰਸਿੱਖਾਂ ਨੂੰ ਹਿਲਾਉਣਾ ਅੰਗਰੇਜ਼ ਗਵਰਨਮੈਂਟ ਨੇ ਥਾ ਥਾ ਬੁੱਚੜਖਾਨੇ ਖੋਲ ਦਿੱਤੇ ਅਮਰਸਰ ਕੰਟਾਕਰ ਚੌਕ ਦੇ ਵਿੱਚ ਬੁੱਚੜਖਾਨਾ ਖੋਲਿਆ ਇੱਥੇ ਨਾਲ ਬੁੱਚੜਖਾਨਾ ਸੀ ਸ਼ਹਿਰਤਾ ਸਾਹਿਬ ਬਾਰ ਅਮਰਸਰ ਤੋਂ ਲਾਹੌਰ ਵਾਲੀ ਸੜਕ ਦੇ ਉੱਤੇ ਇੱਥੇ ਬੁੱਚੜਖਾਨਾ ਖੋਲਿਆ ਜ਼ਿਲ੍ਹਾ ਲੁਧਿਆਣਾ ਪਿੰਡ ਰਾਏਕੋਟ ਵਿੱਚ ਬੁੱਚੜਖਾਨਾ ਖੋਲਿਆ ਮਲੇਰ ਵਿੱਚ ਬਹੁਤ ਵੱਡੇ ਪੈਮਾਨੇ ਤੇ ਬੁੱਚੜਖਾਨੇ ਖੋਲੇ ਪੰਜਾਬ ਦੀ ਧਰਤੀ ਦੇ ਉੱਤੇ ਬੁੱਚੜਖਾਨੇ ਹੀ ਸਾਰੇ ਖੁੱਲ ਗਏ ਸ਼ਰੇਆਮ ਗਊ ਮਾਸ ਖੁੱਲਾ ਵਿਕਣ ਲੱਗਾ ਮੁਸਲਮਾਨਾਂ ਦੀ ਮਦਦ ਹੋ ਗਈ ਉਹ ਅੱਗੇ 14 ਸਾਲ ਇਸ ਕਾਰਵਾਈ ਨੇ ਇਸ ਅੰਗਰੇਜ਼ ਦੀ ਕਾਰਵਾਈ ਨੇ ਹਿੰਦੂਆਂ ਨੂੰ ਬਹੁਤ ਤੰਗ ਕਰ ਦਿੱਤਾ ਹਿੰਦੂ ਤੇ ਸਿੱਖ ਤੰਗ ਹੋਏ ਭਈ ਇੰਨਾ ਜ਼ੁਲਮ ਹੋ ਰਿਹਾ ਪੰਜਾਬ ਦੀ ਧਰਤੀ ਤੇ ਇੱਥੇ ਬਸ ਨਹੀਂ जिस ਵੇਲੇ ਗੁਰਸਿੱਖਾਂ ਨੇ ਵੇਖਿਆ ਧਰਮ ਅਸਥਾਨਾਂ ਵੱਲ ਤੇ ਅੰਗਰੇਜ਼ ਨੇ ਖਾਸ ਤੌਰ ਤੇ ਬੁੱਚੜਖਾਨੇ ਉੱਥੇ खोले ਸਨ ਜਿੱਥੇ कोई ना कोई ਧਰਮ अस्थान ਸੀ ਸਿੱਖਾਂ ਦੀ ਅਣਖ ਨੂੰ ਟੰਬੜ ਵਾਸਤੇ ਭਈ ਵੇਖੀਏ ਕੀ ਕਰਦੇ ਨੇ ਇੱਕ ਜਥਾ ਆਇਆ ਸ੍ਰੀ ਅੰਮ੍ਰਿਤਸਰ ਦਾ ਦਰਸ਼ਨ ਕਰਨ ਵਾਸਤੇ ਸਰਦਾਰ ਬੀਲਾ ਸਿੰਘ ਨਾਰਲੀ ਤੇ ਸੰਤ ਇਹਨਾਂ ਦੇ ਆਪੋ ਵਿੱਚ ਦੇਖਿਆ ਹੈ ਅਸ਼ਨਾਨ ਕਰਨ ਆਏ ਸ੍ਰੀ ਅੰਮ੍ਰਿਤਸਰ ਅੰਮ੍ਰਿਤਸਰ ਗੁਰੂ ਧਾਮ ਦੀ ਬੇਅਦਬੀ ਹੁੰਦੀ ਦੇਖੀ ਕਾਮਾਂ ਤੇ ਇੱਲਾ ਨੇ ਹੱਡੀਆਂ ਤੇ ਬੋਟੀਆਂ ਮਾਸਤੀਆਂ ਚੁੱਕ ਕੇ ਪ੍ਰਕਰਮਾ ਵਿੱਚ ਸੁੱਟਣੀਆਂ ਦੁੱਖ ਭੰਜਣੀ 베ਰੀ ਤੇ ਬਹਿ ਕੇ ਮਾਸਤੀਆਂ ਹੱਡੀਆਂ ਲੋਚਣੀਆਂ ਇਤਿਹਾਸਿਕ ਜਿਸ ਵੇਲੇ ਐਸੀ ਬੇਅਦਬੀ ਇਹਨਾਂ ਨੇ ਦੇਖੀ ਤੇ ਇਹ ਸਹਾਰ ਨਾ ਸਕੇ ਇਸ ਜੱਥੇ ਨੇ ਅੰਮ੍ਰਿਤਸਰ ਦੇ ਬੁਛੜਾ ਨੂੰ ਕਤਲ ਕੀਤਾ ਤੇ ਗਊਆਂ ਦੇ ਰਸੇ ਖੋਲ ਦਿੱਤੇ ਸਾਨੂੰ ਦੇਸ਼ ਦੀ ਆਜ਼ਾਦੀ ਦਾ ਦਾਰਾ ਤੇ ਬਿਗਲ ਵਜਾ ਦਿੱਤਾ ਸਤਿਗੁਰੂ ਰਾਮ ਸਿੰਘ ਜੀ ਨੇ ਸ੍ਰੀ ਪਹਿਨੀ ਸਾਹਿਬ ਤੋਂ ਗੁਰਸਿੱਖਾਂ ਨੂੰ ਉਪਦੇਸ਼ ਐਸਾ ਸੀ ਆਜ਼ਾਦੀ ਦਾ ਬਿਗਲ ਬਚ ਗਿਆ ਗੁਰਸਿੱਖਾਂ ਨੇ ਅੰਗਰੇਜ਼ ਦੇ ਸਾਹਮਣੇ ਡਟ ਕੇ ਮੁਕਾਬਲਾ ਕਰਨ ਵਾਸਤੇ ਸਾਹਮਣੇ ਆਏ ਬੁਛੜ ਕਤਲ ਕਰ ਦਿੱਤੇ ਗਊਆਂ ਦੇ ਰਸੇ ਖੋਲ ਦਿੱਤੇ ਇਸ ਦੇ ਇਵਜਾਦੇ ਵਿੱਚ ਇਹਨਾਂ ਨੂੰ ਰਾਮ ਬਾਗ ਦੇ ਬੋਰਡ ਦੇ ਨਾਲ फांसी ਤੇ ਚਾਰ ਫਸੀ ਦੇ ਦਿੱਤਾ ਗਿਆ ਅੰਗਰੇਜ਼ ਗਵਰਨਮੈਂਟ ਵੱਲੋਂ ਤਾਂ ਕਿ ਅੱਗੇ कदम ਕਦਮ ਨਾ ਪੁੱਟੇ ਐਸਾ ਕਦਮ ਫਿਰ ਹੋਰ ਨਾ ਕੋਈ ਪੁੱਟੇ ਪਰ ਇੱਥੇ ਬਸ ਨਹੀਂ ਹੋਈ ਇਸ ਇਲਾਕੇ ਜਿਲ੍ਹਾ ਲੁਧਿਆਣਾ ਦੇ ਅਲਾਕਾਕੇ ਦੇ ਸਿੱਖਾਂ ਦੇ ਜਿਸ ਵੇਲੇ ਭੈਣੀ ਸਾਹਿਬ ਨੂੰ ਆਉਂਦਿਆਂ ਰਾਏ ਇੱਥੇ ਦਿਨ ਛਿਪ ਗਿਆ ਤੇ ਇਹਨਾਂ ਨੇ ਵਿਚਾਰ ਕੀਤੀ ਰਾਤ ਇੱਥੇ ਰਹਿ ਪਈ। ਇਹ ਸਨ ਗੁਰਮukh ਸਿੰਘ, ਮੰਗਲ ਸਿੰਘ, ਮਸਤਾਨ ਸਿੰਘ ਇਤਿਆਦ ਸਤਗੁਰਾਂ ਦੇ ਸਿੱਖਾਂ ਦਾ ਇਹ ਜਥਾ ਪੈਣੀ ਸਾਹਿਬ ਆਉਣਾ ਸੀ। ਇਹਨਾਂ ਨੇ ਦੇਖਿਆ ਨਾਲ ਹੀ ਇੱਥੇ ਤਾਲੀਆਣਾ ਗੁਰਦੁਆਰਾ ਸਾਹਿਬ ਸੀ ਗੁਰੂ ਗੋਬਿੰਦ ਸਿੰਘ ਜੀ ਦਾ। ਇੱਥੇ ਵੀ ਗੁਰਧਾਮ ਦੀ ਬੇਅਦਬੀ ਉਸੇ ਤਰ੍ਹਾਂ ਹੀ ਹੁੰਦੀ ਦੇਖੀ। ਇਹਨਾਂ ਨੇ ਫਿਰ ਪੈਣੀ ਸਾਹਿਬ ਜਾਣ ਤੋਂ ਪਹਿਲਾਂ ਅਕੇਪੀ ਪਹਿਲਾ ਇਹ ਕੰਮ ਕਰੋ ਕਿ ਗੁਰੂ ਤਾਂ ਹਮ ਦੀ ਬੇਅਦਬੀ ਨਹੀਂ برداشت ਕੀਤੀ ਜਾ ਸਕਦੀ ਰਾਏ ਦੇ ਬੁਚੜਾਂ ਤੇ ਹਮਲਾ ਕੀਤਾ ਬੁਚੜ ਕਤਲ ਕੀਤੇ ਗਉਆਂ ਨੂੰ ਛਡਾਇਆ ਇਹਨਾਂ ਨੇ ਐਸਾ ਹੋਇਆ ਤੇ ਜਿਸ ਵੇਲੇ ਬੁਚੜ ਕਤਲ ਕੀਤੇ ਗਏ ਇਹਨਾਂ ਨੂੰ ਜਿਸ ਵੇਲੇ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਨੇ ਬੜੀ ਖੁਸ਼ੀ ਦੇ ਨਾਲ ਆਪਣਾ ਮਰਨਾ ਕਬੂਲ ਕੀਤਾ ਕਿਉਂਕਿ ਸਤਗੁਰੂ ਵਿੱਚ ਇਹ ਉਪਦੇਸ਼ ਹੈ ਨਾ ਕਿ ਪਹਿਲਾ ਮਰਨ ਕਬੂਲ ਜੇ ਤੂੰ ਕਿਤੇ ਗੁਰਸਿੱਖ ਬਣਨਾ ਹੈ ਤੇ ਪਹਿਲਾ ਮੌਤ ਨੂੰ ਪ੍ਰਵਾਨ ਕਰਨਾ ਪਏਗਾ ਆਜ਼ਾਦੀ ਦੀ ਨਹੀਂ ਰੱਖਣ ਵਾਸਤੇ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਬੜਾ ਕੁਝ ਕਰਨਾ ਪੈਂਦਾ ਕਈ ਕੁਰਬਾਨੀਆਂ ਦੇਣੀਆਂ ਪੈਂਦੀਆਂ ਨੇ ਕਿਸੇ ਕਵੀ ਨੇ ਲਿਖਿਆ ਕਹਿੰਦਾ ਮੁਸਲਮਾਨ ਪੱਕਾ ਮੂਮਨ ਤਾਂ ਬਣਦਾ ਜੇ ਮੁਹੰਮਦ ਦੀ ਪੜੇ ਹਦੀਸ ਪਹਿਲਾਂ एवे रीस ਮਨਸੂਰ ਦੀ नहीं ਹੁੰਦੀ ਪੈਂਦਾ ਸਮਝਣਾ सूली ਨੂੰ ਈਸ ਪਹਿਲਾ ਭਲੇ ਪੁਰਸ਼ਾਂ ਵਿੱਚ ਦਾਖਲਾ ਤਾਂ ਮਿਲਦਾ ਪੈਣੀ ਪੈਂਦੀ ਛੱੜਣੀ 420 ਪਹਿਲਾ ਤੇ ਐਵੇਂ ਦਾਤ ਅਮਰਤੀ ਨਹੀਂ ਨਸੀਬ ਹੁੰਦੀ ਬਹੁਤ ਹੁੰਦੀ ਹੈ ਖਿੱਚ ਕੜੀਸ ਪਹਿਲਾ ਤੇ ਫੇਰ ਨਹੀਂ ਆਜ਼ਾਦੀ ਦੀ ਜਾਇ ਰੱਖੀ ਦੇਣੀ ਪੈਂਦੀ ਏ ਸੀਸ ਦੀ ਪਹਿਲਾ ਪੇਟਾ ਸੀਸ ਕਰਨਾ ਪੈਂਦਾ ਆਜ਼ਾਦੀ ਐਵੇਂ ਨਹੀਂ ਮਿਲਦੀ ਇਹਨਾਂ ਨੇ ਸਿਰ ਪੇਟਾ ਕਰਨ ਵਾਸਤੇ ਬੁੱਚੜਾ ਨੂੰ ਕਤਲ ਕੀਤਾ ਰਾਏਕੋਟ ਵਾਲਿਆਂ ਨੇ ਇਹਦੇ ਗੁਰਮਖ ਸਿੰਘ ਮੰਗਲ ਸਿੰਘ ਮਸਤਾਨ ਸਿੰਘ ਬੁੱਚੜਾ ਨੂੰ ਕਤਲ ਕੀਤਾ ਗਉਆਂ ਨੂੰ ਆਜ਼ਾਦ ਕਰਾ ਦਿੱਤਾ ਅੰਗਰੇਜ਼ ਨੂੰ ਦੱਸਿਆ ਕਿ ਅਸੀਂ ਜਿਉਂਦੇ ਆ ਜੇ ਸਿੱਖਾਂ ਨੇ ਦੱਸਿਆ ਕਿ ਸਿੱਖ ਮਰੇ ਨਹੀਂ ਜਿਉਂਦੇ ਨੇ ਇਹਨਾਂ ਨੂੰ ਰਾਏਕੋਟ ਵਿੱਚ ਫਾਂਸੀ ਦਿੱਤਾ ਗਿਆ ਰੇਸ਼ਮ ਦੇ ਰੱਸਿਆਂ ਨਾਲ ਤਾ ਕਿ ਅਗਾ ਕੋਈ ਕਦਮ ਨਾ ਪੁੱਟੇ ਤੇ ਇਸੇ ਇਲਾਕੇ ਦੇ ਦੋ ਸਿੰਘ ਹੋਰ ਸਣ ਗਿਆਨੀ ਸੁਬਾਰਤਨ ਸਿੰਘ ਤੇ ਇੱਕ ਰਤਨ ਸਿੰਘ ਦੋਹਾਂ ਦਾ ਨਾਮ ਹੈ ਕਿ ਇਹਨਾਂ ਨੇ ਉੱਤੇ ਸ਼ਿਕਾਇਤ ਕੀਤੀ ਪਰ ਇਹਨਾਂ ਦੀ ਮਦਦ ਨਾਲ ਇਹ ਰਾਏਕੋਟ ਬੁਛੜ ਜਿਹੜਾ ਬੁਛੜ ਕਤਲ ਹੋਏ ਦੇ ਇਹਨਾਂ ਦੀ ਇਮਦਾਦ ਤੇ ਇਹਨਾਂ ਦੀ ਸਲਾਹ ਦੇ ਨਾਲ ਹੋਏ ਨੇ ਇਹਨਾਂ ਨੂੰ ਗਵਰਨਮੈਂਟ ਨੇ ਪਕੜ ਲਿਆ ਗ੍ਰਫਤਾਰ ਕੀਤਾ ਤੇ ਇਹ 26 ਨਵੰਬਰ ਵਾਲੇ ਦਿਨ 26 ਨਵੰਬਰ ਨੂੰ ਲੋਹੜਾਣ ਦੀ ਸੰਤਰ ਜੇਲ ਦੇ ਇੱਕ ਬੋਰ ਦੇ ਨਾਲ ਫਾਂਸੀ ਦੇਣ ਦਾ ਐਲਾਨ ਕੀਤਾ ਜਿਸ ਵੇਲੇ ਇਸ ਮੈਦਾਨ ਵਿੱਚ ਸੰਤਰ ਜੇਲ ਵਿੱਚ ਇਹਨਾਂ ਦੋਹਾਂ ਸਿੰਘਾਂ ਨੂੰ ਲਿਆਂਦਾ ਗਿਆ ਤੇ ਸਾਹਮਣੇ ਆਏ ਫਾਂਸੀ ਦੇ ਤੇ ਸੂਬਾ ਰਤਨ ਸਿੰਘ ਜੀ ਫਾਂਸੀ ਦਾ ਰੱਸਾ ਗੱਲ ਵਿੱਚ ਪਾਉਣ ਲੱਗੇ ਜਾਂ ਦਰਖਣਾ ਆਪਣੇ ਆਪ ਫਾਂਸੀਆਂ ਦੇ ਰਸੇ ਗਲ ਵਿੱਚ ਪਾਉਣੇ ਬਹੁਤ ਔਖਾ ਕੰਮ ਹੈ ਗੁਰੂ ਅਰਜਨ ਦੇਵ ਕਹਿੰਦੇ ਨੇ ਜੋ ਤੋ ਪ੍ਰੇਮ ਖੇਲਣ ਦਾ ਚਾਹੋ ਇਹਨੂੰ ਪ੍ਰੇਮ ਦੀ ਗਲੀ ਆਖਿਆ ਨਾ ਇਹ ਵੀ ਇੱਕ ਪ੍ਰੇਮ ਦਾ ਰਸਤਾ ਹੈ ਮੈਂ ਕਹਿੰਦਾ ਸ਼ਹੀਦ ਦੀ ਤੇ ਭਗਤ ਦੀ ਜ਼ਿੰਦਗੀ ਬਹੁਤ ਵਧੀਆ ਹੈ ਪਰ ਭਗਤੀ ਕਰਦਿਆਂ ਪਤਾ ਨਹੀਂ ਕਿੰਨੇ ਚਿਰ ਬਾਅਦ ਉਹ ਭਗਤੀ ਪ੍ਰਵਾਨ ਹੋਵੇ ਤੇ ਤਾਂ ਦੁਨੀਆਂ ਦੇ ਵਿੱਚ ਨਾਮ ਮਨੁੱਖ ਦਾ ਹੁੰਦਾ ਹੈ ਪਰ ਸ਼ਹੀਦ ਇਹ ਕਿ ਇੰਨਾ ਵਧੀਆ ਇਹ ਰਸਤਾ ਹੈ ਪ੍ਰੇਮ ਦਾ ਸ਼ਹੀਦ ਹੁੰਦਿਆ ਏ ਥੋੜੇ ਜਿਨ੍ਹਾਂ ਵਿੱਚ ਆਪਣੀ ਪੇਟਾ ਸੀਸ ਕੁਰਬਾਨ ਕਰਨ ਤੋਂ ਆਪਣੀ ਕੁਰਬਾਨੀ ਦੇਣ ਤੋਂ ਸ਼ਹੀਦ ਭਗਤ ਨਾਲੋਂ ਉੱਚਾ ਹੋ ਜਾਂਦਾ ਤੇ ਦੁਨੀਆਂ ਵਿੱਚ ਮਸ਼ਹੂਰ ਹੋ ਜਾਂਦਾ ਕਿਸੇ ਕਵੀ ਨੇ ਲਿਖਿਆ چتو ٹلتا ہے خون شہیداں دا اے تقدیر بدل دی قوم دی چتو ٹلتا ہے ਤਕਦੀਰ ਬਦਲਦੀ ਕੌਮਾਂ ਦੀ ਰੰਬੀਆਂ ਨਾਲ ਖੋਪਰ ਰੰਦੇ ਜਾਂ ਤਸਵੀਰ ਬਦਲਦੀ ਕੌਮਾਂ ਦੀ ਕੋਈ ਦੇਗਾ ਦੇ ਵਿੱਚ ਉਬਲੇ ਜਾਂ ਸ਼ਾਂਤੀ ਦੇ ਸੋਮੇ ਵਗ ਪੈਂਦੇ ਜਦ ਚਰਬੀ ਢਲੇ ਸ਼ਹੀਦਾਂ ਦੀ ਆਸਾ ਦੇ ਦੀਵੇ ਜਗ ਪੈਂਦੇ ਟੁੱਟਦੇ ਜਾਂ ਤਾਰੇ ਅੱਖੀਆਂ ਦੇ ਰੂਹਾਂ ਵਿੱਚ ਚਾਨਣ ਹੋ ਜਾਵੇ ਜਦ ਉਸਰੇ ਕੰਦ ਮਸੂਮਾਂ ਦੀ ਠੱਠੀ ਹੋਈ ਕੌਮ ਖਲੋ ਜਾਵੇ ਸ਼ਹੀਦ ਹੋਣ ਲੱਗੇ ਸੂਬਾ ਗਿਆਨੀ ਰਤਨ ਸਿੰਘ ਜੀ फांसी ਦਾ ਰੱਸਾ ਰੇਸ਼ਮ ਦੇ ਮੰਗਵਾਏ ਗਏ ਉਹਨਾਂ ਆਖਿਆ ਚਮੜੇ ਦਾ ਰੱਸਾ ਗਲ ਵਿੱਚ ਨਹੀਂ ਪਾਉਣਾ ਅਸੀਂ ਸੱਚ ਮਰ ਜਾਦਾ ਵਿੱਚ ਰਹਿਨੇ ਰੇਸ਼ਮ ਦੇ ਰੱਸੇ ਮੰਗਵਾਏ ਗਏ ਰੇਸ਼ਮ ਦਾ ਰੱਸਾ ਟੰਗਿਆ ਵੱਡਾ ਬੋਰਡ ਦੇ ਨਾਲ ਤੇ ਕਿਆਨੀ ਰਤਨ ਸਿੰਘ ਸੂਬਾ ਰਤਨ ਸਿੰਘ ਜੀ फांसी ਦਾ ਰੱਸਾ ਗਲ ਵਿੱਚ ਪਾਉਣ ਲੱਗੇ ਤੇ ਅੰਗਰੇਜ਼ ਅਫਸਰ ਖਲੋਤਾ ਸੀ ਮੂੰਹ ਪਰ ਹੰਕਾਰ ਲਿਆ ਬਰਦਾਸ਼ਤ ਕਰ ਸਕਿਆ ਸੂਬਾ ਰਤਨ ਸਿੰਘ ਕਹਿੰਦੇ ਨੇ ਬਿੱਲਿਆ ਮੂੰਹ ਪਰ ਇਹਨੂੰ ਕਿਉ ਕਰ ਲਿਆ ਮੇਰੇ ਵੱਲ ਵੇਖ ਤੂੰ ਸਮਝ ਲੈ ਕਿ ਫਾਂਸੀ ਦੇ ਕੇ ਤੇ ਇਹਨਾਂ ਨੂੰ ਮੈਂ ਖਤਮ ਕਰ ਦਿਆਂਗਾ ਐਸਾ ਹੋ ਨਹੀਂ ਸਕਦਾ ਮੈਂ 10 ਮਹੀਨੇ ਕਿਸੇ ਜੱਟੀ ਦੀ ਕੋਖ ਵਿੱਚ ਰਹਿ ਕੇ ਫਿਰ ਆਣ ਕੇ ਤੇਰੇ ਨਾਲ ਲੜਾ ਦੇਸ਼ ਨੂੰ ਆਜ਼ਾਦ ਕਰਕੇ ਸਾਲਾਂਵਾਂਗੇ ਤੈਨੂੰ ਹਿੰਦੁਸਤਾਨ ਚੋਂ ਕੱਢ ਕੇ ਰਾਵਾਂਗੇ ਇਸੇ ਤਰ੍ਹਾਂ ਹੀ ਹੋਇਆ ਮੈਂ ਕਹਿੰਦਾ ਗੁਰਸਿੱਖ ਦੀ ਕਿਤੇ ਉਹ ਮੰਗ ਦੇਖੀ ਜਾਏ ਸਿੱਖਾਂ ਦੇ ਰਾਜ ਤੇ ਮੁਕਤੀ ਨੂੰ ਠੁਕਰਾ ਦਿੱਤਾ ਗੁਰਸਿੱਖ ਕਹਿੰਦਾ ਕਹਿੰਦਾ ਜੰਮ ਮਰਾਂ ਤੇ ਮਰ ਮਰ ਜਮਾ ਜਮਾ ਤੇ ਮਰ ਜਾਵਾਂ ਜੇ ਲੱਖ ਜਨਮ ਦੇਵੇ ਰੱਬ ਮੈਨੂੰ ਪਰ ਤੇਰੀ ਪ੍ਰੀਤ ਕਮਾਵਾਂ ਸਤਗੁਰੂ ਰਾਮ ਸਿੰਘ ਜੀ ਨੂੰ ਮੁਖਾਤਬ ਕਰਕੇ ਕਹਿੰਦਾ ਕਹਿੰਦਾ ਜੰਮ ਮਰਾਂ ਤੇ ਮਰ ਮਰ ਜਮਾ ਤੇ ਮਰ ਜਾਵਾਂ ਜੇ ਲੱਖ ਜਨਮ ਦੇਵੇ ਰੱਬ ਮੈਨੂੰ ਤੇਰੀ ਪ੍ਰੀਤ ਕਮਾਵਾਂ ਸਭ ਦੁਨੀਆਂ ਦੇ ਮਿਹਣੇ ਤਾਨੇ ਝੱਲ ਲਵਾਂ ਮੈਂ ਸਿਰ ਤੇ ਇੱਕ ਤੇਰੇ ਵੱਲੋਂ ਰਹਿ ਆਵੇ ਤੇ ਲੱਖ ਲੱਖ ਸ਼ੁਕਰ ਬਣਾਵਾ ਸੱਚੇ ਪਾਤਸ਼ਾਹ ਜਨਮ ਤੇ ਮਰਨ ਦਾ ਸਾਨੂੰ ਕੋਈ ਡਰ ਨਹੀਂ ਦੇਸ਼ ਦੀ ਆਜ਼ਾਦੀ ਵਾਸਤੇ ਇਹ ਰਿਆਖਿਆ ਸੀ ਦੁਬਾਰਾ ਆਣ ਕੇ ਤੇਰੇ ਨਾਲ ਲੜਾਂਗੇ ਜਨਮ ਧਾਰ-ਧਾਰ ਕੇ ਤੈਨੂੰ ਇੱਥੋਂ ਹਿੰਦੁਸਤਾਨ ਚੋਂ ਕੱਢ ਕੇ ਸਾਲਵਾਂਗੇ ਤੈਨੂੰ ਜਾਣਾ ਪਏਗਾ ਦੇਸ਼ ਨੂੰ ਆਜ਼ਾਦ ਕਰਨਾ ਪਏਗਾ ਚੈਲੰਜ ਕੀਤਾ ਅੰਗਰੇਜ਼ ਨੂੰ ਉੱਚੀ ਆਵਾਜ਼ ਨਾਲ ਆਖਿਆ ਫਾਸੀ ਦਾ ਰੱਸਾ ਗਲ ਵਿੱਚ ਪਾਇਆ ਝੂਟਾ ਆਇਆ ਸੰਸਾਰ ਤੋਂ ਦੇਸ਼ ਧਰਮ ਦੀ ਖਾਤਰ ਕੁਰਬਾਨ ਹੋ ਗਏ ਦੋਵੇਂ ਸਿੱਖ ਰਤਨ ਸਿੰਘ ਤੇ ਸੁਬਾ ਰਤਨ ਸਿੰਘ ਇਹ 26 ਨਵੰਬਰ ਦਾ ਕਾંડ ਹੈ 1871 ਸੋ ਮੈਂ ਅਰਜ ਕਰ ਰਿਹਾ ਸਾ ਸਿੱਖਾਂ ਨੇ ਗੁਰ ਨੇ ਸਤਗੁਰੂ ਰਾਮ ਸਿੰਘ ਜੀ ਦੇ ਸਿੱਖਾਂ ਨੇ ਦੇਸ਼ ਦੀ ਆਜ਼ਾਦੀ ਵਾਸਤੇ ਅਤਿਅੰਤ ਯਤਨ ਕੀਤੇ अनेका ਹਜ਼ਾਰਾਂ ਸ਼ਹੀਦੀਆਂ ਤੇ ਆਪਣੇ ਕੁਰਬਾਨੀਆਂ ਦਿੱਤੀਆਂ ਤਾਂ ਜਾ ਕੇ ਦੇਸ਼ ਆਜ਼ਾਦ ਹੋਇਆ ਇਸੇ ਤਰ੍ਹਾਂ ਹੀ ਮਲੇਰਕੋਟੜੇ ਵਿੱਚ ਹੋਇਆ ਦੇਸ਼ ਦੀ ਆਜ਼ਾਦੀ ਵਾਸਤੇ ਬੁਚੜ ਕਤਲ ਕੀਤੇ ਗਏ ਸਰਦਾਰ ਹੀਰਾ ਸਿੰਘ ਤੇ ਲਹਿਣਾ ਸਿੰਘ ਇਹਨਾਂ ਦੇ ਸਰਦਾਰ ਸਣ ਆਗੂ ਸਣ ਜਥੇ ਦੇ ਬੁਚੜਾ ਨੂੰ ਕਤਲ ਕੀਤਾ ਪਿੰਡ ਰੜ ਤੋਂ ਜਥੇ ਨੇ ਗ੍ਰਿਫਤਾਰੀ ਦਿੱਤੀ ਇਸ ਜਥੇ ਨੂੰ ਡਿਪਟੀ ਕਮਿਸ਼ਨਰ ਕਾਵਣ ਨੇ ਮਲੇਰ ਕੋਟਲੇ ਦੇ ਰਕਣ ਵਿੱਚ ਖੜਿਆ ਕੀਤਾ ਲਿਆ ਕੇ ਨੌ ਤੋਪਾਂ ਬੁਲਾਈਆਂ ਗਈਆਂ ਮੰਗਵਾਗੀਆਂ ਗਈਆਂ ਸੱਤ ਤੋਪਾਂ ਬੀੜੀਆਂ ਇਹਨਾਂ ਨੂੰ ਉਡਾਉਣ ਵਾਸਤੇ ਤੇ ਇਹਨਾਂ ਫੈਸਲਾ ਕੀਤਾ ਤੋਪਾਂ ਨਾਲ ਬੰਨ ਕੇ ਉਡਾ ਦੇਾਂਗੇ ਇਹਨਾਂ ਆਖਿਆ ਇਸ ਤਰ੍ਹਾਂ ਨਹੀਂ ਕਰਨਾ ਬੰਨਣ ਦੀ ਕੋਈ ਜ਼ਰੂਰਤ ਨਹੀਂ ਪੈਗੀ ਤੈਨੂੰ ਅਸੀਂ ਮਰਨ ਵਾਸਤੇ ਆਇਆ ਸ਼ਹੀਦ ਹੋਣ ਵਾਸਤੇ ਆਇਆ ਤੋਪਾਂ ਦੇ ਸਾਹਮਣੇ ਖਲੋਵਾਂਗੇ ਸੱਤ ਤੋਪਾਂ ਬੀੜੀਆਂ ਸਤ ਸਿੰਘ ਅਸ਼ਨਾਣ करके ਅਰਦਾਸਾ ਸੋਧਿਆ ਸਰਦਾਰ ਹੀਰਾ ਸਿੰਘ ਨੇ ਸਾਹਮਣੇ ਖਲੋਤੇ ਤੋਪ ਦਾ ਪਲੀਤਾ ਲਾਇਆ ਗਿਆ ਤੋਪ ਨਹੀਂ ਸੀ ਚੱਲਦੀ ਸਿੱਖ ਨੇ ਅਰਦਾਸਾ ਕੀਤਾ ਹੋਇਆ ਤੋਪ ਨਹੀਂ ਚੱਲਦੀ ਤੋਪਾਂ ਫੇਲ ਹੋ ਗਈਆਂ ਦੁਬਾਰਾ ਫੇਰ ਪਲੀਤਾ ਲਾਇਆ ਫੇਰ ਨਹੀਂ ਤੋਪ ਚੱਲੀ ਕਾਵਣ ਨੇ ਜਾ ਕੇ ਤੋਪ ਦਾ ਮਲਾਜਾ ਕੀਤਾ ਤੇ ਤੋਪ ਸੀ ਬਦਲੇ ਅੰਗਰੇਜ਼ ਪੈਤਨ ਹੈਰ ਪਲੀਤਾ ਲਾਇਆ ਤੋਪ ਤੀਸਰੀ ਵਾਰ ਵੀ ਨਹੀਂ ਚੱਲੀ ਹੀਰਾ ਸਿੰਘ ਨੇ ਆਖਿਆ ਬਿੱਲਿਆ ਤੇਰੇ ਕਹਿਣ ਨਾਲ ਤੇਰੇ ਆਰਡਰ ਨਾਲ ਤੋਪ ਨਹੀਂ ਚੱਲਣੀ ਮੈਂ ਤੇ ਤੇਰਾ ਕਾਨੂੰਨ ਹੀ ਦੇਖਣਾ ਸੀ ਲੈ ਹੁਣ ਮੇਰੇ ਸਤਿਗੁਰੂ ਰਾਮ ਸਿੰਘ ਜੀ ਦਾ ਹੁਕਮ ਆਇਆ ਤੋਪ ਚੱਲੇਗੀ ਤੋਪਾਂ ਚੱਲੀਆਂ ਚੌਥੀ ਵਾਰ ਪਲੀਤਾ ਲਾਇਆ ਉੱਠੀ ਗਰਜ ਮਹਾਨਾ ਚੜੀ ਸਮਾਨਾ ਫਿਤੀ ਫਿਤੀ ਹੋ ਉੱਡ ਗਈਆਂ ਨੇ ਖੜੀਆਂ ਸੱਤੇ ਜਾਨਾ ਮਿਟੇ ਨਿਸ਼ਾਨਾ ਛੱਤ ਉੱਡ ਜਾਂਦੇ ਨੇ ਸੱਤ ਹੋਰ ਆਣ ਖਲੋਂਦੇ ਨੇ ਇਹਨਾਂ ਵਿੱਚ ਹੀ ਸਰਦਾਰ ਬਰਿਆਮ ਸਿੰਘ ਆਇਆ ਸਾਹਮਣੇ ਖਲੋਤਾ ਕਦਮ ਅਧਰੈ ਇਹਦੀ ਸਫਾਰਸ਼ ਆਈ ਪਿੱਛੋਂ ਭਈ ਇਹਨੂੰ ਰਿਹਾ ਕੀਤਾ ਜਾਏ ਕਿਨੂੰ ਆਖਿਆ ਬਰਿਆਮ ਸਿੰਘ ਆ ਤੇਰਾ ਕਦਮ ਅਧਰੈ ਤੋਪ ਦੇ ਨਿਸ਼ਾਨੇ ਦੇ ਸਾਹਮਣੇ ਫਿੱਟ ਨਹੀਂ ਆਉਂਦੀ ਤੇਰੀ ਛਾਤੀ ਤੂੰ ਜਾ ਸਕਨੇ ਇਹ ਕਹਿੰਦਾ ਮੈਂ ਜਾਣਾ ਨਹੀਂ ਬਸ ਇਹੀ ਤੇ ਗੱਲ ਕਹਿੰਦਾ ਮੈਂ ਵਤਨ ਦਾ ਸਿਪਾਹੀ ਹਾਂ ਤੇ ਵਤਨ ਖਾਤਰ ਲੜਾਂਗਾ ਦੁਨੀਆਂ ਦੇ ਸਾਹਮਣੇ ਵਤਨ ਤੋਂ ਹੱਸ ਹੱਸ ਕੇ ਸੂਲੀ ਚੜਾਂਗਾ ਇਹ ਵਤਨ ਮੇਰਾ ਵਤਨ ਹੈ ਤੇ ਵਤਨ ਮੇਰੀ ਜਾਨ ਹੈ ਇਸ ਵਤਨ ਦੀ ਮੈਂ ਸ਼ਮਾਂ ਤੋਂ ਪਰਵਾਹ ਨਾ ਬਣ ਕੇ ਸੜਾਂਗਾ ਕਹਿੰਦਾ ਮੈਂ ਰਣ ਭੂਮੀ ਵਿੱਚ ਮੌਤ ਵੇਖ ਕੇ ਭੱਜਣ ਮੈਂ ਸੱਚਾ ਵਤਨ ਸਿਪਾਈ ਹਾਂ ਕੋਈ ਕਾਇਰ ਦੀ ਤਸਵੀਰ ਨਹੀਂ ਮੈਂ ਪਾਣੀ ਵਾਂਗਰ ਖੂਨ ਨੂੰ ਝਟ ਰੋੜਾ ਵਿੱਚ ਮੈਦਾਨ ਦੇ ਡੱਟ ਜਾਵਾ ਵਾਂਗ ਚਟਾਨ ਦੇ ਮੇਰਾ ਕੰਬਿਆ ਕਦੇ ਸ਼ਰੀਰ ਨਹੀਂ ਸਰਦਾਰ ਬਰਿਆਮ ਸਿੰਘ ਨੇ ਢੇਮਾਂ ਲਿਆਂਦੀਆਂ ਕੱਚੀਆਂ ਕੱਟੀਆਂ ਕਰਕੇ ਇੱਕ ਫੋਟੋ ਚ ਠੜੀ ਬਣਾਈ ਉੱਤੇ ਖਲੋ ਕੇ ਉੱਚੀ ਆਵਾਜ਼ ਨਾਲ ਆਖਿਆ ਬਿੱਲਿਆ ਵੇਖ ਮੇਰੀ ਛਾਤੀ ਤੋਪ ਦੇ ਸਾਹਮਣੇ ਫੇਟਾਈ ਆ ਕਿ ਨਹੀਂ ਆਈ ਕਾਵਣ ਦੀਆਂ ਅੱਖਾਂ ਜਿਦੀਆਂ ਬਹੁਤ ਜ਼ਿਆਦਾ ਉਡਾ ਦਿਓ ਟੋਪ ਦਾ ਫੈਰ ਹੋਇਆ ਟੁੰਬੇ ਟੁੰਬੇ ਹੋ ਕੇ ਉੱਡ ਗਿਆ ਸਿੱਖ ਮੈਂ ਅਰਜ਼ ਕਰ ਰਿਹਾ ਸਾਂ ਸਤਿਗੁਰੂ ਰਾਮ ਸਿੰਘ ਜੀ ਦਾ ਉਪਦੇਸ਼ ਸੀ ਨਾ ਹੁਕਮ ਸੀ ਕਿ ਦੇਸ਼ ਦੀ ਆਜ਼ਾਦੀ ਵਾਸਤੇ ਇਹ ਕੁਛ ਕਰਨਾ ਗੁਰਬਾਣੀ ਵਿੱਚ ਹੁਕਮ ਆਇਆ ਸੀ ਕਿ ਮਰਨ ਪਹਿਲਾ ਕਬੂਲ ਕਰ ਲੋ ਪਹਿਲਾ ਮਰਨ ਕਬੂਲ ਕੇ ਉਡ ਗਿਆ ਸਿੱਖ ਸਰਦਾਰ ਬਰਿਆਮ ਸਿੰਘ ਕਹਿੰਦੇ ਨੇ 7/7/49 ਦੇ ਹੋਏ ਟੁੱਟੇ ਬਾਕੀ ਰਹਿ ਗਿਆ ਇੱਕ ਨਦਾਨ ਬੱਚਾ ਅਸਲ ਵਿੱਚ ਇਹ 12 ਕੁ ਸਾਲ ਦਾ ਸੀ ਧਰਮ ਵਿੱਚ ਸੀ ਪੂਰਾ ਪਰਵਾਨ ਬੱਚਾ ਖੇਮਕੌਰ ਦੀ ਕੁੱਖ ਦਾ ਲਾਡਲਾ ਏ ਆਇਆ ਧਰਮ ਤੋਂ ਹੋਣ ਕੁਰਬਾਨ ਬੱਚਾ ਤੇ ਮੇਮ ਕਾਵਣ ਦੀ ਕਾਵਣ ਨੂੰ ਕਹਿਣ ਲੱਗੀ ਛੱਡੋ ਸੋਹਣਾ ਏ ਭੋਲਾ ਅਜਾਣ ਬੱਚਾ 12 ਸਾਲ ਦਾ ਬੱਚਾ 7ਵੀਂ ਕਤਾਰ ਤੋਂ ਬਾਅਦ ਸਾਹਮਣੇ ਆਇਆ ਤੋਪ ਦੇ ਧਿਆਨ ਰੱਖਣਾ ਸਤਿਗੁਰੂ ਰਾਮ ਸਿੰਘ ਦੇ ਜਵਾਨਿਆਂ ਨੇ ਦੇਸ਼ ਦੀ ਆਜ਼ਾਦੀ ਵਾਸਤੇ ਕਿਸ ਤਰ੍ਹਾਂ ਆਪਣਾ ਸਭ ਤੋਂ ਪਹਿਲਾ ਹਿੱਸਾ ਲਿਆ ਦੇਸ਼ ਦੀ ਆਜ਼ਾਦੀ ਵਾਸਤੇ ਆਪਣਾ ਆਪ ਕੁਰਬਾਨ ਕੀਤਾ ਇਹਨਾਂ ਨੇ 12 ਸਾਲ ਦਾ ਬੱਚਾ ਆੜ ਕੇ ਤੋਪ ਦੇ ਸਾਹਮਣੇ ਖਲੋਤਾ ਹੈ ਕਾਮਨ ਦੀ ਮੇਮ ਨਾਲ ਗਈ ਉਸੀਏ ਦਾ ਦਿਲ ਹਿਲ ਗਿਆ ਇਸ ਨੇ ਆਖਿਆ ਸਾਹਿਬ ਐਸੇ ਮਸੂਮ ਬੱਚੇ ਦੇ ਉੱਤੇ ਵਾਰ ਕਰਨਾ ਕੋਈ ਧਰਮ ਆਜਾਜਤ ਨਹੀਂ ਦਿੰਦਾ ਕੋਈ ਗ੍ਰੰਥਾਜਾਜਤ ਨਹੀਂ ਦਿੰਦਾ ਇਹਨੂੰ ਰਿਹਾ ਕਰ ਦੇਣਾ ਚਾਹੀਦਾ ਕਾਮਣ ਦੇ ਆਖਿਆ ਕਾਨੂੰਨ ਨਹੀਂ ਛੱਡਦਾ ਇਹ ਬਾਗੀ ਹੈ ਬਾਗੀ ਜੱਥੇ ਨਾਲ ਆਇਆ ਹੋਇਆ ਇਸ ਵਾਸਤੇ ਕਾਨੂੰਨ ਅਜਾਜਤ ਨਹੀਂ ਦਿੰਦਾ ਇਹਨੂੰ ਛੱਡਿਆ ਜਾਏ ਇਹਨੇ ਆਖਿਆ ਇਹਨੂੰ ਕਾਨੂੰਨ ਦਾ ਪਤਾ ਹੀ ਕੀ ਹੈ ਇਹਨੂੰ ਆਜ਼ਾਦੀ ਤੇ ਗੁਲਾਮੀ ਦਾ ਕੀ ਗਿਆਨ ਹੈ ਇਹਨੂੰ ਸਦਕੇ ਤੇ ਆਖੋ ਇਹਨੂੰ ਰਿਹਾ ਕਰ ਦਿਓ ਸਰ ਨੇ ਲਾ ਕੇ ਨੇੜੇ ਬੁਲਾਇਆ ਬਿਸ਼ਨ ਸਿੰਘ ਉਰੇ ਆ ਪਈ ਸਾਹਮਣੇ ਆਇਆ ਕਾਮਣ ਦੇ ਆਖਿਆ ਬਿਸ਼ਨ ਸਿੰਘ ਤੇਰੀ ਉਮਰ ਛੋਟੀ ਐ ਤੇ ਤੈਨੂੰ ਰਹਾ ਕਰ ਦੇਾਂਗੇ ਤੂੰ ਬਿਆਨ ਦੇ ਦੇ ਕਿ ਮੈਂ ਅੰਗਰੇਜ਼ ਗਵਰਨਮੈਂਟ ਦਾ ਵਫਾਦਾਰ ਹੋ ਕੇ ਰਾਵਾਂਗਾ ਮੈਂ ਭਲੇਖੇ ਨਾਲ ਬਾਗੀ ਜੱਥੇ ਨਾਲ ਆ ਗਿਆ ਮੈਂ ਸਤਕਰੂ ਰਾਮ ਸਿੰਘ ਦਾ ਸਿੱਖ ਨਹੀਂ ਜੇ ਇਹ ਕਹਿ ਦੇਵੇ ਤੇ ਤੈਨੂੰ ਰਹਾ ਕਰ ਦੇਾਂਗੇ ਅਜੇ ਇਹ ਗੱਲਾਂ ਕਰਦਿਆਂ ਇਹ ਆਖਿਆ ਜਵਾਬ ਦੇ ਤੈਨੂੰ ਠੀਕ ਹੈ ਕਿ ਨਹੀਂ ਤੇ ਇਹਨੂੰ ਜਵਾਬ ਦਿੱਤਾ ਬਿਸ਼ਨ ਸਿੰਘ ਜਵਾਬ ਦਿੰਦਾ ਕਹਿੰਦੇ ਨੇ ਬਿਸ਼ਨ ਸਿੰਘ ਨੇ ਮੋੜ ਜਵਾਬ ਦਿੱਤਾ ਮੈਨੂੰ ਪਰਖ ਕਠਵਸ ਕਿਸਵਟੀ ਤੇ ਲਾ ਦੇਖੋ ਸ਼ੀ ਕਮ ਅਗਿਆਰ ਦੇ ਲਾਲ ਕਰਕੇ ਮੇਰੇ ਬदन ਦੇ ਵਿੱਚ ਤਸਾਹ ਵੇਖੋ ਸੁੱਤ ਦਿਓ ਹਿਮਾਲਾ ਦੀਆਂ ਚੋਟੀਆਂ ਤੋਂ ਮੈਨੂੰ ਸੂਲੀ ਦੇ ਉੱਤੇ ਟੰਗਾ ਦੇਖੋ ਮੇਰਾ ਸਿਦਕ ਅਡੋਲ ਨਹੀਂ ਡੋਲ ਸਕਦਾ ਤੂੰ ਤੋਪ ਦੇ ਨਾਲ ਉਡਾ ਦੇਖੋ ਜਤੀ ਜਤ ਛੱਡੇ ਸਤੀ ਸਤ ਛੱਡੇ ਤਮੋ ਗੁਣ ਅੰਦਰ ਵਿਸ਼ਨੂੰ ਆ ਸਕਦਾ ਜੀਵਨ ਹੋਣ ਅਣਹੋਣੀਆਂ ਸਭ ਗੱਲਾਂ ਬਿਸ਼ਨ ਸਿੰਘ ਨਹੀਂ ਧਰਮ ਡੁਲਾ ਸਕਦਾ ਦਰਦ ਕੇ ਜਵਾਬ ਦਿੱਤਾ ਇਸ ਨੇ ਸਖਤ ਜਵਾਬ ਸੁਣ ਕੇ ਤੇ ਕਾਮਨ ਗੁੱਸੇ ਵਿੱਚ ਆਇਆ ਨਾਮ ਧਾਰੀ ਪੰਥ ਦੀ ਸ਼ਾਨ ਦੇ ਖਿਲਾਫ ਬੋਲ ਕਬੋਲ ਬੋਲੇ ਸਤਗੁਰੂ ਰਾਮ ਸਿੰਘ ਜੀ ਦੀ ਸ਼ਾਨ ਦੇ ਖਿਲਾਫ ਇਸ ਨੇ ਬੋਲ ਕਬੋਲ ਬੋਲਣੇ ਸ਼ੁਰੂ ਕੀਤੇ ਤੇ ਸਿੱਖ ਨੇ ਬਰਦਾਸ਼ਤਰੀ ਕੀਤਾ ਇਸ ਨੇ ਮਾਰ ਕੇ ਸ਼ਾਲ ਕਾਮਨ ਨੂੰ ਦਾੜੀ ਤੋਂ ਫੜ ਕੇ ਧਰਤੀ ਤੇ ਸੁੱਟ ਕੇ ਤੇ ਛਾਤੀ ਤੇ ਬਹਿ ਗਿਆ ਕਹਿੰਦੇ ਤੋਪਾਂ ਦੇ ਅੱਗੇ ਉਡਾ ਦੇ ਤੂੰ ਮੈਨੂੰ ਸ਼ਹੀਦਾਂ ਦੀ ਬਸਤੀ ਪਹੁੰਚਾ ਦੇ ਤੂੰ ਮੈਨੂੰ ਤੂੰ ਮੈਨੂੰ ਸ਼ਹਾਦਤ ਦਾ ਪਿਆਲਾ ਪਿਲਾ ਦੇ ਤਾਂ ਅਰਜਨ ਗੁਰੂ ਜੀ ਦੀ ਬਸਤੀ ਪੁਲਾ ਪੁਚਾ ਦੇ ਮੈਂ ਹਰ ਟੈਮ ਹਰ ਪਹਿਰ ਹਰ ਪਲ ਕਹਾਂਗਾ ਮੈਂ ਸਿੱਖਾਂ ਗੁਰੂ ਕਾ ਤੇ ਸਿੱਖ ਹੀ ਰਹਾਂਗਾ ਗੁਰੂ ਰਾਮ ਸਿੰਘ ਜੀ ਦਾ ਸਿੱਖਾ ਮੈਂ ਪੂਰਾ ਮੈਂ ਜੀ ਕੇ ਨਹੀਂ ਰੱਖਣਾ ਇਹ ਜੀਵਨ ਅਧੂਰਾ ਮੈਂ ਹਾ ਨਾਮ ਧਾਰੀ ਪੱਕਾ ਨਾਮ ਧਾਰੀ ਗੁਰੂ ਰਾਮ ਸਿੰਘ ਜੀ ਤੋਂ ਜਿੰਦੜੀ ਹੈ ਵਾਰੀ ਮੈਂ 100 ਵਾਰੀ ਸਿਰ ਉੱਤੇ ਸ਼ਸਤਰ ਸਹਾਗਾ ਮੈਂ ਸਿੱਖਾ ਗੁਰੂ ਘਰ ਤੇ ਸਿੱਖੀ ਰਹਾਗਾ ਕਹਿੰਦਾ ਮੈਂ ਬੱਚਾ ਨਹੀਂ ਹਾਂ ਨਾ ਸਮਝੀ ਅਜਾਣਾ ਮੈਂ ਆਸ਼ਿਕ ਆਜ਼ਾਦੀ ਦਾ ਤੇਥੋਂ ਸਿਆਣਾ ਗੁਰੂ ਰਾਮ ਸਿੰਘ ਜੀ ਨੇ ਸਿੱਖਿਆ ਸਿਖਾਈ ਚੰਗੀ ਆਜ਼ਾਦੀ ਤੋਂ ਦੌਲਤ ਨਾ ਕਾਈ ਮੈਂ ਚੜ ਕੇ ਚਰਖੜੀ ਤੇ ਹੱਸ-ਹੱਸ ਬਹਾਗਾ ਮੈਂ ਸਿੱਖਾ ਗੁਰੂ ਕਾ ਤੇ ਸਿੱਖੀ ਰਹਾਗਾ ਐਸਾ ਰੁਗ ਕਾਵਣ ਦੀ ਦਾੜੀ ਨੂੰ ਪਾਇਆ ਖਿੱਚ ਕੇ ਹੇਠਾਂ ਨੂੰ ਜਮੀ ਤੇ ਵਗਾਇਆ ਕਹਿੰਦਾ ਫੇਰ ਕਹੇਗਾ ਛੱਡ ਸਿੱਖੀ ਨੂੰ ਆਪਣੇ ਦਿਮਾਗੋਂ ਤੂੰ ਕੱਢ ਸਿੱਖੀ ਨੂੰ ਮੈਂ ਤੈਨੂੰ ਜਹੰਨਮ ਦੇ ਵਿੱਚ ਪਹੁੰਚਾਗਾ ਮੈਂ ਸਿੱਖਾ ਗੁਰੂ ਕਾ ਤੇ ਸਿੱਖੀ ਰਹਾਗਾ ਐਸੇ ਲੱਗੇ ਛੁਡਾਵਣ ਪਰ ਦਾੜੀ ਨਾ ਛੱਡੇ ਆਖਰ ਬਹਾਦਰ ਦੇ ਫੜ ਹੱਥ ਵੱਡੇ ਲਈ ਤੇਗ ਤਿੱਖੀ ਢੜੋ ਸਿਰ ਉਡਾਇਆ ਜਾਂਦੇ ਹੋਏ ਸਿੱਖ ਨੇ ਬਚਨ ਇਹ ਸੁਣਾਇਆ ਮੈਂ ਬਾਦਮ ਸ਼ਹੀਦਾਂ ਦੇ ਵਿੱਚ ਕਾਰ ਬਹਾਗਾ ਮੈਂ ਸਿੱਖਾ ਗੁਰੂ ਕਾ ਤੇ ਸਿੱਖ ਹੀ ਰਹਾਂਗਾ ਸਿੱਖ ਨੂੰ 12 ਸਾਲ ਦੇ ਬੱਚੇ ਨੂੰ ਤਲਵਾਰਾਂ ਦੇ ਨਾਲ ਕਤਲ ਕਰ ਦਿੱਤਾ ਸਿਪਾਈਆਂ ਨੇ ਇਸ ਤਰੀਕੇ ਨਾਲ ਸਤਗੁਰੂ ਰਾਮ ਸਿੰਘ ਜੀ ਦੇ ਦੀਵਾਨਿਆਂ ਨੇ ਦੇਸ਼ ਦੀ ਆਜ਼ਾਦੀ ਵਾਸਤੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਤੇ ਸਤਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਜਿਸ ਦਿਨ ਤੋਂ 1857 ਈਸਵੀ ਤੇ ਵਿਸਾਖੀ ਵਾਲੇ ਦਿਨ ਤੋਂ ਇਹ ਆਜ਼ਾਦੀ ਦਾ ਬਿਗਲ ਵਜਾਇਆ ਸੀ ਤੇ ਉਹਨਾਂ ਦੀ ਕਿਰਪਾ ਦੇ ਨਾਲ ਪੂਰੇ 90 ਸਾਲ ਬਾਅਦ ਸਾਰਾ ਹਿੰਦੁਸਤਾਨ ਆਜ਼ਾਦ ਹੋ ਗਿਆ ਤੇ ਸਾਨੂੰ ਆਜ਼ਾਦੀ ਮਿਲੀ ਇਹ ਸਤਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੀ ਬਹੁਤ ਵੱਡਾ ਉਪਕਾਰ ਤੇ ਦੇਣ ਹੈ ਆਪ ਜਲਾਵਤਰ ਹੋ ਗਏ ਸੈਂਕੜੇ ਸੈਂਕੜੇ ਟੋਪਾਂ ਨਾਲ ਤੇ ਫਾਸੀਆਂ ਤੇ ਉੜਾ ਦਿੱਤਾ ਕਈ ਸਮੁੰਦਰਾਂ ਵਿੱਚ ਡੋਬ ਦਿੱਤੇ ਕਈ ਜੇਲਾਂ ਵਿੱਚ ਚੜਾਈ ਕਰ ਗਏ ਇਸ ਤਰੀਕੇ ਨਾਲ ਦੇਸ਼ ਦੀ ਆਜ਼ਾਦੀ ਮਿਲੀ ਏ ਸਾਨੂੰ ਸੋ ਮੈਂ ਅਰਜ਼ ਕਰ ਰਿਹਾ ਸਾਂ 26 ਨਵੰਬਰ ਦੇ ਦਿਹਾੜੇ ਦੇ ਉੱਤੇ ਇਹ ਸੂਬਾ ਗਿਆਨੀ ਰਤਨ ਸਿੰਘ ਜੀ ਤੇ ਰਤਨ ਸਿੰਘ ਉਹਨਾਂ ਦੀ ਸ਼ਹੀਦੀ ਹੋਈ ਫਾਸੀ ਤੇ ਚੜੇ ਸਨ ਤੇ ਉਸ ਵੇਲੇ ਆਪ ਗੱਲ ਚੁਪਾਏ ਤੇ ਵੇਖਣ ਵਾਲੀ ਲੋਕਾਈ ਨੇ ਲੋਕਾਂ ਨੇ ਇਹ ਗੱਲ ਕਹਿ ਦਿੱਤੀ ਸੀ ਆਓ ਜੀ ਕਿਨੂ ਗੁਰਮੁਖ ਜਾਂਦਾ ਇਹ ਖੇਲ ਕੱਟ ਗਿਆ ਕਿਨੂ ਕੋਲ ਬੱਕ ਜਾਂਦਾ ਇਹ ਖੇਲ